ਅਥ ਹਰ ਕੋ ਅਕਰੂਰ ਮਥਰਾ ਗੋਲ ਜੈ ਬੋ ਸੂਈਆ ਰਿਪ ਕੋ ਹਰੇ ਮਾਰ ਗਏ ਜਬ ਹੀ ਅਕਰੂਰ ਕਿਦੋ ਚਲ ਕਹਿ ਤੈ ਆਇਓ ਸ਼ਾਮ ਕੋ ਦੇਖ ਪ੍ਰਣਾਮ ਕਰਿਓ ਆਪਣੇ ਮਨ ਮੈਂ ਅਤ ਹੀ ਸੁਖ ਪਾਇਓ ਕੰਸ ਸੋ ਕੈ ਬਿੰਤੀ ਜਦ ਆਪਣੇ ਸਾਥ ਰਿਝਾਇਓ ਅੰਕਸ ਸੋ ਗਜ ਜੋ ਹਰ ਕੋ ਤਮ ਬਾਤਨ ਤੇ ਹਿਰ ਲਿਆਇਓ ਸੁਨ ਕਹਿ ਬਤਿਆ ਤਿਹ ਕੀ ਹਰਜੂ ਪਿਤ ਧਾਮ ਗਏ ਇਹ ਬਾਤ ਸੁਨਾਈ ਮੋਏ ਅਬੈ ਕਰੂਰ ਕੇ ਹਾਥ ਬੁਲਾਏ ਪਠਿਓ ਮਥਰਾ ਹੁ ਕੇ ਰਾਈ ਦੇਖਤ ਹੀ ਤਿਹ ਮੂਰਤ ਨੰਦ ਕਹੀ ਤੂਰੇ ਤਨ ਹੈ ਕੁਸਰਾਈ ਕਾਹੇ ਕੀ ਹੈ ਕੁਸਰਾਤ ਕਹਿਓ ਏ ਭਾਂਤ ਬੁਲਿਓ ਮੁਸਲੀ ਧਰ ਭਾਈ ਅਥ ਮਥਰਾ ਮੈਂ ਹਰ ਕੋ ਆਗਮ ਸੁਵੇਯਾ ਸੁਨ ਕਹਿ ਸੰਗ ਗਵਾਰ ਲੈ ਬ੍ਰਿਜ ਰਾਤ ਚਲਿਓ ਕੋ ਤਵੇ ਬਕਰੇ ਅਤ ਲੈ ਪੁਨ ਸ਼ੀਰ ਕਨੋ ਧਰ ਕੈ ਮੁਸਲੀ ਤਰਸਿਆਮ ਸਿਆਮ ਅੱਗੇ ਤੇਹ ਦੇਖ ਤੀ ਸੁਖੋਤ ਕੋ ਜੇ ਦੇਖਤ ਪਾਪ ਮਨੋ ਮਨੋਗਵਾਰਨ ਕੋ ਬਨ ਸੁੰਦਰ ਮੈ ਸਾਮ ਕੇ ਹਰ ਕੀ ਲੱਗੈ ਦਹੁਰਾ ਮਥਰਾ ਹਰ ਕੇ ਜਾਨ ਕੀ ਸੁਣੀ ਜਸੋਦਾ ਬਾਤ ਤਬੈ ਲੱਗੀ ਰੋਦਨ ਕਰਨ ਭੂਲ ਗਈ ਸੁਦ ਸਾਤ ਸွေਯਾ ਰੋਵਨ ਲਾਗ ਜਬੈ ਜਿਸ ਦਾ ਆਪਣੇ ਮੁਖਤੇ ਪਾਂਸੂ ਭਾਖੈ ਕੋ ਹੈ ਤੂੰ ਹਮਰੋ ਬ੍ਰਿਜ ਮੈਂ ਚਲਦੇ ਹਰ ਕੋ ਬ੍ਰਿਜ ਮੈਂ ਫਿਰ ਰਾਖੈ ਹੈ ਸੋ ਕੋ ਠੀਠ ਕਰੈ ਜੀਵੋ ਨਿਰਭਸਾਮਹ ਜਾ ਬਤਿਆ ਇਹ ਭਾਖੈ ਸੋਗ ਪਰਿ ਮੁਰਜਾਇ ਗਿਰੀ ਧਰਨੀ ਵਰਸੋ ਬਤਿਆ ਨਹਿ ਭਾਖੈ ਸੋਈਆ ਬਾਰਾ ਮਾਸ ਰਖਿਓ ਉਦਰੇ ਮਹਿ ਤੇਰੇ ਮਾਸ ਪਹਿ ਜੋ ਜੀਆ ਪਾਲ ਵਡੋ ਜੋ ਕਰਿਓ ਤਵਹੀ ਹਰ ਕੋ ਸੁਨਮੈ ਮੁਸਲੀ ਧਰ ਭਈਆ ताही के काज के दो बस देव को कहै सुत बोल पठैया पै हमरे कट पागन के कर पीतर पै नहीं श्याम रही याद होरा रथ ऊपर महाराज के रथ चढ़कै तज गृह गोपन कथा बिरलाप की पई संत सुन लेह सोईया जब ही चल बे की सुनी बतिया तब गवर्ण नैन ते नीर धरयो गिनती तिनके मन बीच भई मन को सब आनंद दूर करयो ਜਿਤਨੋ ਤਿਨ ਮੈਂ ਰਸ ਜੋਵਨ ਥੋ ਦੁਖ ਕੀ ਸੋਈ ਈ ਧਰਮਾ ਹੈ ਜਰਿਓ ਤਿਨ ਤਿਹ ਨਹੀਂ ਬੋਲਿਓ ਜਾਤ ਕਛੂ ਮਨ ਕਾਨ ਕੀ ਪ੍ਰੀਤ ਕੋ ਸੰਗ ਜਰਿਓ ਸਵਈਆ ਜਾ ਸੰਗ ਕਾਵਤ ਥੀ ਮਿਲ ਗੀਤ ਕਰੈ ਮਿਲ ਕੈ ਜੇ ਸੰਗ ਅਖਾਰੇ ਜਾਇਤ ਲੋਗਨ ਆਸੈ ਹੋ ਤਿਹ ਸੰਗ ਫਿਰੈ ਨਹ ਵਿਚਾਰੇ ਜਾ ਹਮਰੋ ਅਤੀ ਇਤ ਕੈ ਲਰ ਆਪ ਬਣੀ ਤਿੰਨ ਦਾਇਤ ਵਿਚਾਰੇ ਸੋ ਤਰ ਕੈ ਬ੍ਰਿਜ ਮੰਡਲ ਕੋ ਸਜਨੀ ਮਥਰਾ ਹੂ ਕੀ ਓਰ ਪਦਾਰੇ ਸਈਆ पंजाही ਕੇ संग सुनो सजनी हमरो जमुना तड नेहो भयो है ताही के बीज रहयो गड कै तिह ते नहीं छूटण नायक गयो है ता चलबे की सुनी बतिया अतहि मन पीत शोक छयो है सो सुनिय सजनी हम कहो तज कै बृज कहो मथुरा को गयो है अतहि हित सो संग खेलत जा कभ श्याम कहै अत ਰਾਸ ਕੇ ਭੀਤਰ ਜੋ ਨਸਕੈ ਰਤ ਸਾమన్ ਕੀ ਚਮਕੈ ਜਿਮਦਾਮਨੇ ਚੰਦ ਮੁਖੀ ਤਨ ਕੰਚਨ ਸੇ ਦ੍ਰਿਗ ਕੰਝ ਪ੍ਰਵਾਹ ਜੋ ਚਲੈ ਗਜ ਗਾਮਨ ਤਿਆਗ ਦਿਨ ਮथुरा ਕੋ ਚਲਿਓ ਜਦ ਸੁਨੋ ਸਜਨੀ ਅਬ ਧਾਮਨ ਮੁਖੀ ਤਨ ਕੰਚਨ ਸੇ ਬਿਰਲਾਪ ਕਰੈ ਹੱਥ ਸੋ ਹਿਤ ਲਾਈ ਸੋਕ ਭਇਓ ਤਿਨ ਕੇ ਮਨ ਬੀਚ ਅਸੋਕ ਗਇਓ ਤੈਨੂੰ ਹੂੰ ਤੈਨਸਾਈ पाखत है ए पौंत सुनो सजनी हम त्याग ਹੈ है ਆਪ आप गए मथुरापुर में जदरए ना जानत पीर पुराई अंग बखए सज कह भगवो पट हाथ नु मैं छिपिया हम लै हैं शीस रहगी जटाय अपने हरि मुहूर्त पे छ को मांगया गहैं श्याम चले जेठा और बखए हम तेठौर बखए चल जाय हैं त्याग कहो हम धामन को ਸਭ ਹੀ ਮਿਲ ਕੇ ਖਮ ਜੋਗਨ ਵਹਿ ਹੈ ਬੋਲਤ ਘਾਰ ਨੇ ਆਪਸ ਮੈਂ ਸੁਨੀਐ ਸਜਨੀ ਖਮ ਕਾਮ ਕਰਾਂਗੀ ਤਿਆ ਕਹਿਓ ਹਮ ਤਾਂ ਮਨ ਕਉ ਚਿਪਿਆ ਗਹਿ ਸੀਸ ਜਟਾਨ ਧਰਾਂਗੀ ਕਹਿ ਬਿਖ ਖਾਏ ਮਰਾਂਗੀ ਕਹਿਓ ਨਹੀਂ ਬੂਡ ਮਰਾਂ ਨਹੀਂ ਜਾਏ ਜਰਾਂਗੀ ਮਨ ਮੇ ਉਹ ਕਹ ਸਭ ਕਾਨ ਕਹ ਸਾਥ ਤੇ ਪੈ ਨ ਟਰਾਂਗੀ ਜਿਹਨੂੰ ਹਮਰੇ ਸੰਗ ਕੇਲ ਕਰੇ ਬਨ ਬੀਜ ਬੈ ਹਮ ਕਹ ਸੁਖ ਭਾਰੇ ਜਾ ਹਮਰੇ ਹਦਾਸ ਹੈ ਹਮਰੇ ਹਿਤ ਕਹ ਜਿਹ ਦੈ ਪੁਛਾਰੇ ਰਾਸ ਵਿਗੈ ਜੇ ਗਵਾਰਨ ਕੇ ਮਨ ਕੇ ਸਭ ਸੋਖ ਵਿਦਾ ਕਰ ਡਾਰੇ ਸੋ ਸੁਨੀਐ ਹਮਰੇ ਹਿਤ ਕੋ ਤਜ ਕੈ ਸੋ ਅਬੈ ਮਥਰਾ ਕੋ ਪਧਾਰੇ मुन्द्रक का पहरे हम कानन अंग भखए भगवे पटके हैं हाथ न पै छिपिया धरके अपने तन वीर विभूत भी लगे हैं पै कस कह सिनिया कट मैं हरके संग गोरखनाथ जगए हैं गुवार न आए भांत कह तज कै हम धामन जोगन होए हैं स्वया कै भख खाए मरेगी कहो अपने तन को नहकात करे हैं ਮਾਰ ਛੁਰੀ ਆਪਣੇ ਤਨ ਮੈਂ ਹਰ ਕੇ ਹਮ ਉਪਰ ਪਾਪ ਚੜਾਏ ਹੈ ਨਾ ਤਰ ਬ੍ਰਹਮ ਕੇ ਜਾ ਪੁਰਮੈਂ ਬਿਰਥਾ ਇਹ ਕੀ ਸੁਪਕਾਰ ਕਰੈ ਹੈ ਗਵਰਨੀਆਂ ਐ ਭਾਂਤ ਕਹੈ ਬ੍ਰਿਜ ਤੇ ਹਰ ਕੋ ਹਮ ਜਾਣ ਨਦੈ ਹੈ ਸੋਈਆ ਸੇਲੀ ਡਰੈ ਜੀ ਕਰੈ ਆਪਣੇ ਬਟੂਆ ਆਪਣੂ ਕਟ ਸਾਥ ਕਸੈ ਹੈ ਲੈ ਕਰ ਬੀਚ ਦਰਸੂਲ ਕਿਦੋ ਫਰਵਾ ਤਿਹ ਸਹ ਮਹਿ ਧੂਪ ਜਗੈ ਹੈ ਕੋਟ ਕਹਿ ਤਾਈ ਕੇ ਧਿਆਨ ਕੀ ਭਾਂਗੇ ਕਹ ਕਬ ਸਿਆਮ ਸੋਬਾਹੀ ਚੜੈ ਹੈ ਗਵਾਰ ਆਏ ਬਾਤ ਕਹ ਨਰ ਹੈ ਹਮ ਧਾਮਨ ਜੋਗਨ ਹੋਵੈ ਤੂੰ ਹਮ ਡਰਐ ਤੇ ਕੇ ਗ੍ਰਹਿ ਸਾਵੇਂ ਔਰ ਕਛੂ ਨਹਿ ਕਾਰਜ ਕਹਿ ਹੈ ਧਿਆਨ ਤਰਹਿਗੀ ਕਿਦੋ ਤੇ ਕੋ ਤੇ ਧਿਆਨ ਕੀ ਭਾਂ ਕੈ ਸੋ ਮਤ ਹੋਐ ਲੈ ਤੇ ਕੇ ਫੁਨ ਪਾਇਨ ਧੂਰ ਕਿਦੋ ਸੋ ਵਿਭੂਤ ਕੀ ਠੌਰ ਜੜਾ ਹੈ ਕਹਿਤ ਗਵਾਰ ਨੀ ਆਐ ਸੋ ਕਹਿ ਤਜ ਕਹਿ ਗ੍ਰਹਿ ਕੋ ਹਮ ਜੋਗਨ ਕਹਿ ਆਪਣੇ ਮਨ ਕੀ ਫੁਨਮਾਲ ਕਹਿ ਕਬ ਵਾਹੀ ਕੋ ਨਾਮ ਜਪੈ ਹੈ ਕਹਿ ਭਾਂਤ ਕੀ ਪੈ ਤਪ ਸਾਹਿਤ ਸੋ ਤਹ ਤੇ ਜਦੁ ਰਾਏ ਰਜੈ ਹੈ ਮਾਗ ਸਬੈ ਤੇ ਤੇ ਮਿਲ ਕੈ ਬਰ ਭਾਇਨ ਭੈ ਤੇ ਤੇ ਹਮ ਲਿਐ ਹੈ ਯਾ ਤੇ ਵਿਚਾਰ ਕਹ ਗੁਪੀਆ ਤਜ ਕਹਿ ਹਮ ਧਾ ਮਨ ਜੋਗਨੁ ਹੋਇ ਹੈ ਠਾਡੀ ਹੈ ਹੋਏ ਕਤਰ ਤ੍ਰਿਆ ਜਿਮ ਘੰਟ ਗਹਿਰ ਬਜਾਇ ਮਿਰਗਾਇਲ ਸਿਆਮ ਕਹ ਕਬ ਹਰੈ ਹਰ ਕੋ ਹਰਿ ਉਪਰ ਹੋਇ ਆਤਮਾਇਰ ਧਿਆਨ ਲਗਾ ਤ੍ਰਿਕ ਮੂਦ ਰਹਿ ਉਗਰ ਹੈ ਨਿਗਟੈ ਤਿਹ ਜਾਨ ਉਤਾਇਲ ਯੋ ਤੇ ਆਖ ਵਹਾਰਤ ਘਾਇਲ ਸੁਇਆ ਕੰਚਨ ਕੇ ਤਨ ਜੋ ਸੰਥੀ ਜੋ ਹਤੀ ਸੰਗਵਾਰਨ ਚੰਦ ਕਰਾ ਸੀ ਮੈਂ ਕੀ ਸਾਨ ਸੋ ਸਾਨ ਬਣੀ ਦੋ ਬਹੁ ਮਨੋ ਅਖਿਆ ਸਮਗਾਸੀ ਦੇਖਤ ਜਾਤ ਹੀ ਸੁਖ ਨਹਿ ਦੇਖਤ ਹੀ ਤਿਹ ਹੋਤ ਉਦਾਸੀ श्याम बिना सस पै जल की मनो कंज मुखी पई सूख जरासी सोइया राति ऊपर श्याम चढ़ाए के सो संग लै सब गोप तहां को गए हैं ग्वालनियां सो रही ग्रह में जिनके मन बीच सो शोक भय है ठाड़ उडीकत गोप जहां ते ठाोर बिखै दु ए सो ए है है सस से जिन मुख कांचन से तन रूप छय है ਸੋ ਹੀਆ ਅੰਭਾਵਹੀ ਅਕਰੂਰ ਕੇ ਸੰਗ ਕਿਦੋ ਜਮਨਾ ਪੈ ਗਏ ਪ੍ਰਿਥੀ ਲੋਕ ਸਵੈ ਅਕਰੂਰ ਹੀ ਚਿੰਤ ਕਰੀ ਮਨ ਮੈਂ ਅਧਿ ਭਾਵ ਕਰਿਓ ਹਮ ਹੂ ਸੋ ਅਬੈ ਤਬ ਹੀ ਤਜ ਕੈ ਰਥ ਬੀਜ ਤਸਿਓ ਜਲ ਕੇ ਸੰਧਿਆ ਕਰ ਬੇਕ ਉਤਵੈ ਇਹ ਕੋ ਮਰ ਹੈ ਨਿਰਬਕੰਸ ਵਲੀ ਜੋ ਭਈ ਇਹ ਕੀਤ ਚਿੰਤ ਜਬੈ ਗਹੋਰਾ ਨਾਤ ਜਬੈ ਅਕਰੂਰ ਮਨ ਹਰ ਕੋ ਕਰਿਓ ਵਿਚਾਰ तब तेह को जल मै तवै दर्शन दयो मुरार सुरिया मुंड हजार पूजा सासे दस शेष के आसन पै सो बिराजे पीत लसै पट चक्कर करै जेहि के कर पीतर नंद विछाजे बीत तबै जमुना प्रकट्यो फुन साधन के हर बे डर काजे जा को कहो सबहि जग है ਜਾਲ ਤੇ ਕੱਢ ਕੈ ਮਨ ਮੈਂ ਸੁਖ ਕੈ ਮਥੁਰਾ ਕੋ ਚਲਿਊ ਮਨ ਆਨੰਦ ਪਾਈ ਧਾਇ ਗਿਓ ਨਿਰਭਕੇ ਪੁਰ ਮੈਂ ਹਰ ਮਾਰਨ ਕੀ ਨਾ ਕਰੀ ਦੁਜਿਤਾਈ ਕਾਨ ਕੋ ਰੂਪ ਨਿਹਾਰਨ ਕੋ ਮਥੁਰਾ ਕੀ ਜੁਰੀ ਸਭ ਾਨ ਲੁਕਾਈ ਜਾਕੇ ਕਛੂ ਤਨ ਮੈਂ ਦੁਖ ਗੈ ਹਰ ਦੇਖਤ ਹੀ ਸੋ ਪਾਰ ਪਰਾਈ ਹਰ ਕੀ ਸੁਨ ਕੈ ਬਤੀਆ ਉਠ ਗੈ ਮਥੁਰਾ ਕੀ ਸਵੇ ਤ੍ਰਿਏ ਧਾਈ ਆਵਤ ਥੋਰ ਰਤਵੀ ਚੜਿਓ ਚਲ ਕੈ ਤੇ ਹਠੌਰ ਬਖੈ ਸੋ ਆਈ ਮੂਰਤ ਦੇਖੈ ਰੀਜ ਰਹੀ ਹਰਿ ਆਨਨ ਓਰ ਰਹੀ ਲਿਵ ਲਾਈ ਸੋਕ ਕਥਾ ਜਿਤਨੀ ਮਨ ਥੀ ਇਹ ਓਰ ਨਿਹਾਰ ਦਈ ਵਿਸਰਾਈ ਇਤ ਸ੍ਰੀ ਦਸ਼ਮ ਸਕੰਦੇ ਪ੍ਰਾਣੇ ਵਿਚਿਤ੍ਰ ਨਾਟਕ ਕ੍ਰਿਸ਼ਨ ਆਮਤਾਰੇ ਕਾਨਜੂ ਨੰਦ ਔ ਗੋਪਨ ਸਹਾਯਤ ਪ੍ਰਵੇਸ਼ ਕਰਨ